ਫਿਰ ਨਾ ਦਰਦਾ ਬੁੱਲਾ ਚਲਾਉਂਦਾ ਉਹ ਜਿਹੜਾ ਮੈਨੂੰ ਵੀ ਲਵਾਦੀ ਮੁੰਡਾ ਕੇ ਨਾਲ ਤੋ ਆਹੋ ਉਹੀ ਓਏ ਉਹ ਆਪਣਾ ਸਿੱਧੂ ਐ ਪਿੱਛੋਂ ਮੂਸੇ ਪਿੰਡ ਤੋਂ ਸੁਣੀਦਾ ਕੱਲ ਅਖਬਾਰ 'ਚ ਤਾਂ ਫੋਟੋ ਲੱਗੀ ਸੀ ਤਾਂ ਹੀ ਮੈਂ ਪੁੱਛਾ ਦਿੱਥੋਂ ਤੇ ਬਾਹਰ ਆਇਆ ਹੋਇਆ ਅੱਛਾ ਫਿਰ ਤਾਂ ਨਵਈਆ ਮੁੰਡਾ ਹੈ ओ हाँ हां मुंडा दा नवा ही है पर तंदे च बहुत पुराना है चढ़ाई या याट दी पूरी आज